ਗੂਜਰੀ ਸ੍ਰੀ ਰਵਿਦਾ ਜੀ ਕੇ ਪਦੇ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਦੁੱਧ ਦਾ ਬਛਰਾ ਥਣੇ ਬਿਟਾਰਿਓ ਫੂਲ ਭਵਨ ਜਲ ਮੀਨ ਬਗਾ ਰਿਓ ਹਜ਼ਰਦਾਲੀ ਗੱਲ ਆ ਗਈ ਰਵਦਾ ਤੇ ਕਹਾਣੀ ਬਣਾਈ ਹੋਈ ਹੈ ਕਹਿਆ ਦੁੱਧ ਦਾ ਬਛਰੇ ਨੇ ਥਣ ਦੇ ਕਰਤਾ ਝੂਠਾ ਕਰਤਾ ਤੇ ਥਰਡ ਬੋਟ ਪਾਲਿਆ ਬਛਰੇ ਨੇ ਦੁੱਧ ਪੀ ਲਿਆ ਤੇ ਦੁੱਧ ਦਾ ਘਾਰੇ ਉੱਤਦੇ ਜਿਉਠਾਈ ਹੋ ਗਿਆ ਫਰ ਅਰੇ ਬੱਚੇ ਜੂਠਾ ਹੋ ਗਿਆ ਉਹ ਬੜਾ ਪੱਗ ਰਹੀ ਚੀਜ਼ ਹੈ ਘੁੱਟ ਪਾ ਲਈਏ ਸਾਰੇ ਜੂਠਾ ਹੋ ਜਾਂਦਾ پوری ਘੁੱਟਾ ਪਰੇ ਹੋਦੇ ਅੱਛਾ ਤੋ ਤੂੰ ਉੱਥੇ ਮੂੰਹ ਦਤਾ ਉੱਥੇ ਮੂੰਹ ਲਾਤਾ ਜਿਵੇਂ ਨਿਕਲਦਾ ਕਦਰਛੇ ਤਾਂ ਥਾਰਾ ਇੱਕੋ ਸੀ ਇਹ ਤੋ ਧਾਰਿਆ ਸੀ ਸਾਰੇ ਜਲੇ ਕਰੰਟ ਹੱਥ ਲਾ ਦੀਏ ਤਾਰੀਖਾ ਦੇ ਫਿਰ ਉਹ ਜੂੜ ਸੱਚ ਬੰਦਨ ਵਾਲੇ ਉਹ ਜੂਠਾ ਖਲਾ ਗਿਆ ਵੀ ਹੁਡੀ ਨਿਕਲ ਉਹ ਉਹ ਵਜਰ ਦੇ ਬੋਹਲਾਤਾ ਥਣੇ ਵਟਾਰੇਓ ਫੂਲ ਓ ਭਵਰ ਜਲ ਮੀਨ ਬਿਗਾ ਰਿਓ ਫੁੱਲ ਨਾਲ ਜਲ ਪੌਰਾ ਬੈਠਿਆ ਉਹਨੂੰ ਝੂਠਾ ਕਰਦਾ ਬੱਚੀ ਪਾਣੀ ਜਿਹੜੀ ਪਾਣੀ ਉਹਨੂੰ ਖਰਾਬ ਕਰਦਾ ਜਲ ਮੀਨ ਬਿਗਾ ਰਿਓ ਪਾਣੀ ਉਹਨੇ ਖਰਾਬ ਕਰਦਾ ਜਲ ਬੱਚੀ ਨੂੰ ਖਰਾਬ ਕਰਦਾ ਉਹ ਬੈਠਾ ਕਰਦੀ ਪੂਜਾ ਕਾਦੇ ਰੋ ਕਰ ਦੁੱਧ ਵੀ ਗਿਆ ਫੁੱਲ ਵੀ ਗਿਆ ਪਾਣੀ ਵੀ ਮਾਈ ਗੋਬਿੰਦ ਪੂਜਾ ਕਹਾਂ ਲੈ ਚੜਾਵਾਂੁਰ ਬਾਈ ਕਹੇ ਅ ਗੋਬਿੰਦ ਦੀ ਪੂਜਾ ਨੂੰ ਦੱਸੋ ਕੀ ਕਰਾਂ ਉਹ ਕਿੱਥੇ ਲੈ ਕੇ ਜਾਵਾਂ ਰੈ ਪੁੱਛਦਾ ਕਿ ਦੂਮਾਤਨੀ ਮਾਈ ਤੋਂ ਦੂਮਾਤਰੂਪੀ ਮਾਈ ਤੋਂ ਪੁੱਛਦਾ ਵੀ ਦੱਸ ਕੀ ਮੇਰੇ ਕਿਤੇ ਚੜਾਉੜੀ ਐ ਉਹ ਤਾਂ ਉਹਦਾ ਪੁੱਛਦਾਰਾ ਤੂੰ ਜੋ ਪੂਜਾ ਕਰਦੀ ਐ ਆ ਬਈ ਦੱਸ ਕੀ ਕਰ ਮੇਰਾ ਨਹੀਂ ਮਨ ਬੰਦ ਆਏ ਪੂਜਾ ਕਰ ਝੂਠਿਆ ਜੀ ਜਨਤਾ ਗਰੂ ਚੜਾਈ ਦੇ ਅਵਰਨਾ ਫੂਲ ਅਨੂਪ ਨਾ ਪਾਉਂ ਕੀ ਚੜਾਵੋ ਬਿਰਦਸ ਅਵਰਨਾ ਅਵਰਨਾ ਫੂਲ ਅਨੂਪ ਨਾ ਪਾਉਂ ਹੋਰ ਕੋਈ ਆ ਜਾ ਫੁੱਲ ਦੀ ਜਿਹੜਾ ਮੈਂ ਲਿਆਵਾਂਗਾ ਤੂੰ ਸਦਾ ਦੇ ਹੀ ਜਿਹੜੇ ਫੁੱਲ ਨੇ ਹੀ ਰੂਪਨਾ ਬਾਬੂ ਇਹ ਆ ਰੂਪ ਫੋਲ ਦਾ ਮੇਰੇ ਕੋਈ ਨਹੀਂ ਹੈਗਾ ਸੱਜਾਰ ਤੋਂ ਪਰੇ ਦਾ ਹੋਵੇ ਪਰ ਹੈਗਾ ਹੈਗਾ ਉਹ ਜਿਹੜਾ ਖੜਿਆ ਹੋਇਆ ਉਹ ਚੜੌੜਾ ਸਰਦਾ ਕਮਲ ਪ੍ਰਗਾਸਿਆ ਹੋਇਆ ਉਹ ਚੜੌੜਾ ਉਹ ਤਾਂ ਹੈਗਾ ਪਰ ਦਸਲੀ ਰਹਾ ਚੜੌੜਾ ਸੀ ਉਹ ਜਰਾ ਤੇ ਬਾਹਲੇ ਫੋਲ ਤੁਸੀਂ ਤਾਲਮਨ ਤੁਨ ਦਾ ਸੰਪੂਰਨ ਸੀ ਤਾਲਮਨ ਕੀ ਪੂਛਦਾ ਹਿਰਦੇ ਜਿਹੜਾ ਕਮਲ ਪ੍ਰਕਾਸ਼ ਆਇਆ ਜਿਹਨੂੰ ਹਿਰਦੇ ਆਲਾ ਕਬੂਲ ਉਹਦੇ ਪੂਰੇ ਰੱਖਣਾ ਸੀ ਰਹਾਉ ਮੈ ਲਾਗਰ ਹੈ ਭਿਆਂਗਾ ਆ ਜਿਹੜਾ ਚੰਦਨਾ ਇਹਦੇ ਰਕਦੇ ਸਪਲਿਫਟੇ ਰਕਦੇ ਸਾਰਾ ਉਹਥੇ ਆਇਆ ਹੋਇਆ ਇਹ ਕਿਹੜਾ ਚੰਦਨਾ ਸ਼ੁੱਧ ਹੈ ਬਲਾਗਰ ਚੱਦਰ ਨੂੰ ਗੱਲ ਦੇ ਢੇਰੇ ਹੈ ਪਈ ਹੰਗਾ ਉਹ ਜੱਗ ਦਾ ਸੱਪ ਉਹ ਸੱਪ ਲਿਫਟੇ ਰਹੇ ਦਰ ਇਹ ਕਿਹੜਾ ਸ਼ੁੱਧ ਹੈ ਬਿਖ ਅਮਰਤ ਬਸਾਂ ਕਸੰਗਾ ਬਿਖ ਅਮਰਤ ਇਹ ਬੜੀ ਗੱਲ ਹੈ ਇਹਦੇ ਨੂੰ ਕਿਹਾ ਬਿਖ ਅਮਰਤ ਇੱਕ ਹੈ ਬਿਖ ਅਮਰਤ ਠੱਠੇ ਹੀ ਬਸਦੇ ਇਤਕੋ ਜਗ੍ਹਾ ਬਸਦੇ ਜੇ ਦੁੱਧ ਦਾ ਵਰਤ ਹੈ ਤੇ ਪੀ ਲੈ ਦੇ ਬਿਖੇ ਤੋਂ ਉਤਰ ਗਿਆ ਫਿਰ ਜਿਹੜੇ ਛੱਤੀ ਅੰਬਰ ਖਾਣੇ ਹੈ ਜਿਹੜੀ ਉਹਨਾਂ ਦੀ ਬਿਖਵਲ ਦੀ ਉਹ ਕਾਹ ਚ ਇਕੱਠੀ ਹੋਈ ਵਿੱਚ ਇਹ ਮਾਇਆ ਜੇ ਬੇਖੜਾ ਹੈ ਜੜ ਜੇ ਬੇਖੜਾ ਹੈ ਚੇਤਨੂ ਵਰਤ ਹੈ ਇਹ ਵੀ ਇਕੱਠੀ ਬਸਦੇ ਮਾਇਆ ਬ੍ਰਹਮ ਰਮੇ ਸਾਧ ਵੇਦਰਾ ਰੱਬਰ ਤੁਹਾਨੂੰ ਜੱਗ ਇਕੱਠੇ ਕਰਦਾ ਨਾਮ ਅਵਰਤ ਹੈ ਅਬ ਆਇਆ ਆਇਆ ਦੇ ਉੱਤੇ ਹੁਕਮ ਚੱਲਦਾ ਰੋ ਉਪੂਈ ਦੇ ਚੱਲਦਾ ਪੈਵੇਂ ਚ ਦੂਰ ਨਹੀਂ ਪੈਵੇਂ ਚਲਦਾ ਸੂਰਜ ਕੀ ਆਇਆ ਵੈਸੋ ਹੁਕਮ ਕੀ ਅਵਰਤ ਇਕੱਠੇ ਹੀ ਬਾਤ ਹੈ ਹੁਕਮ ਨਾਲ ਮਾਇਆ ਪੈਦਾ ਹੋਇਆ ਜਾਂ ਹੁਕਮ ਦੇ ਵਿੱਚ ਮਾਇਆ ਹਰ ਵਕਤ ਹੁਕਮ ਨਾਲ ਤੋਂ ਬੰਦਾ ਦਾ ਰੋਕ ਬਰੋਗ ਨਾ ਬਬਰਦਾ ਇਹ ਆਟ ਕਰਕੇ ਰੱਖੋ ਤੁਸੀਂ ਬਾਇ ਰੂਹ ਕੋ ਤੂੰ ਜੇ ਤੂੰ ਜੜ ਤੋਂ ਆਟ ਕਰਕੇ ਰੱਖੋ ਇਕੱਠੇ ਰੰਗ ਸੁਵੇਸ਼ਾਈ ਇਕੱਠੇ ਕਰ ਚੇਤਨ ਤੂੰ ਸਰਬੇ ਪੀ ਹੈ ਜਦ ਬਾਇ ਜਾਉ ਕਿੱਥੇ ਛੱਡ ਕੇ ਤੂੰ ਜੇ ਤੂੰ ਸਰਬੇ ਮਾਇਆ ਦੇ ਵਿਚੇ ਰਹੂ ਸਕਦੇ ਹੋਰ ਰੂਪੋ ਦੀਪ ਨਹੀਂ ਵਿਦੇ ਬਾਸਾ ਉਪਦੇਵ है ਜਗਾਈ ਹੋਈ ਤੇਰੀ ਨਹੀਂ ਬਿਰਦੇਵਾਸਾ ਅਰੇ ਬਾਝੜਾ ਕੀਤੀ ਹੋਈ ਆ ਆ ਉਪਦੇਵ ਦੇ ਸੁਭਦੇ ਹੋਰ ਹੈ ਜਿਹੜੀ ਆ ਤਰ ਵਗੈਰਾ ਤਾਂ ਕੈਸੇ ਪੂਜ ਕਰੇ ਤੇਰੀ ਦਾਸਾ ਫਿਰ ਬਾ ਦੇਖੋ ਚੱਲਦੀ ਉਪਦੇੜੀ ਰੋ ਦੇ ਆ ਲੰਗਰ ਭੇਗੇ ਵਿੜੇ ਵੇ ਭਾਂਗਾ ਉਹ ਤਾਂ ਸਾਰਾ ਕੁਝ ਇਹ ਮੈਂ ਹੀ ਦਿੱਤਾ ਮੈਂ ਸਾਰੀ ਵਿਖਿਆ ਉਹ ਵਿਖਿਆ ਨਾਲ ਪੂਜਾ ਕਰਾਂ ਤੇਰੀ ਕਿਵੇਂ ਪੂਜ ਕਰੇ ਤੇਰੀ ਦੱਸਾ ਮੈਂ ਵਿਖਿਆ ਨਾਲ ਪੂਜਾ ਕਰਾਂ ਤੇਰੀ ਅਬਰ ਤੇ ਵਿਖੜਣਾ ਬਬ ਬੈਠ ਜਿਹੜਾ ਪਰਲਮਾਨ ਅਰਤੂ ਪੂਜ ਚੜਾਉਂ ਆ ਗੱਲ ਤੁਸੀਂ ਇਹ ਤੋਂ ਤਾਂ ਫਿਰ ਮਾਇ ਦਾ ਪੂਜਾ ਤਰੀ ਚੜਾ ਦਿੰਦਾ ਪਰ ਬਾਹਰ ਨਾਲ ਕੁਛ ਇਹਦਾ ਬੇਖ ਬਾਹਰ ਇਹ ਨੀ ਮੈਂ ਕਥਾ ਦਾ ਮੈਡੀਕਲ ਉਹ ਬੇਖ ਜਿਹੜਾ ਵੇ ਮੈਂ ਤੈਨੂੰ ਭਿਖ ਜੜਾਈ ਦੇ ਦੇ ਤੈਨੂੰ ਜਦ ਕੀ ਜੜ ਉਹਨੇ ਕੋ ਗੁਰੂ ਨੂੰ ਕੀ ਜੜਾ ਹੁੰਦਾ ਵੇਖ ਆ ਕੱਟੀ ਹੋਈ ਆ ਸਾਰੀ ਉਹ ਇਹ ਦਰਜਾ ਸ਼ਬਦ ਦਰਜਾ ਗੁਰੂ ਗ੍ਰੰਥ ਸਾਹਿਬ ਕਿਉਂ ਦਰਜੀ ਤਾ ਪੁੱਛਣੋਂ ਜਾ ਕੇ ਜਿਹਨੂੰ ਦਰਜੀ ਤਾ ਉਹ ਬਿਤਾਇਆ ਕੀਤਾ ਵੀ ਇਹ ਤਾਂ ਖੋਲ-ਖੋਲ ਲਈ ਦਿੱਤੇ ਕਿਤੇ ਕ ਸੂਈ ਜਿਹੜਾ ਗਜਬੀ ਜਗਾਨੀ ਛੱਡੀ ਹੋਈ ਤੁਸੀਂ ਮਾਇਆ ਕਿ ਆਹ ਫੁੱਲ ਜਿਹੜੇ ਲੈ ਕੇ ਆਉਂਦੇ ਨੇ ਉੱਥੇ ਇਹਨੂੰ ਪੁੱਛੇ ਮਕਾਉਣ ਲੱਗੇ ਹੋ ਗੁਰੂ ਨੂੰ ਕੁਝ ਇਹ ਬੋਲਣ ਲੱਗੇ ਉਹ ਲੋ ਗੁਰੂ ਤਾਂ ਬਸਾਂ ਨਹੀਂ ਕਰਦਾ ਇਹਨਾਂ ਨੂੰ ਤਾਂ ਮਨਾ ਕਰਦਾ ਤੂੰ ਜੇ ਉੱਥੇ ਆਪਣੀ ਮਰਜ਼ੀ ਕਰਦੇ ਹੋ ਮਰਜ਼ੀ ਆਪਣੀ ਕਰਦੇ ਹੋ ਬਲਵਤ ਤੇ ਚੱਲ ਵੀ ਮਰਜ਼ੀ ਆਪਣੀ ਜਿਹੜੀ ਗੱਲ ਹਟਾਏ ਤੇ ਉਹ ਤਾਂ ਤੁਸੀਂ ਗੁਰੂ ਨੂੰ ਚੜਾ ਕੇ ਲਿਆਦੇ ਮਰਜ਼ੀ ਤੇ ਨਹੀਂ ਗੁਰੂ ਦੀ ਚੜ੍ਹ ਵੀ ਮੇਨ ਗੁਰਦੁਆਰੇ ਜਿਹਾ ਨੇ ਹਾਂ ਗੁਰੂ ਦਾ ਸਭ ਪਖੰਡਾ ਹੈ ਮਰਜ਼ੀ ਉਹਦੀ ਆਪਣੀ چلਦੀ ਹੈ ਗੁਰਮਤਿ ਬਾਹਰ ਦੇ ਰੋਤੋ ਗੁਰਮਤਿ ਕਮਾਉ ਬਰਗੇ ਮਨ ਉਹ ਖੋਜੀ ਜਾਂਦੀ ਹੈ ਗੁਰਮਤਿ ਸਾਰਾ ਗੱਲ ਖਰਾਬ ਜਾਣ ਬੁਝ ਕੇ ਕਰਦੇ ਹੋ ਅਪਰਾਧ ਕਰੀ ਜਾਂਦੇ ਹੋ ਜਾਣ ਬੁਝ ਕੇ ਨਾ ਜਾਓ ਫੋਲਾ ਬਲ ਕਿ ਥੋੜੇ ਆ ਜਾ ਬੋਲ ਨਹੀਂ ਜੇ ਫਿਰ ਕੀ ਹੋ ਗੋਲਕ ਜ਼ਰੂਰੀ ਉਹ ਥੀਟਰ ਹੋਣੀ ਪਿਛੇ ਰੱਖ ਲੋ ਕੋਈ ਅਫਸਰ ਉੱਥੇ ਜਬਤ ਰਾਈ ਹੋ ਜੀ ਤਾਂ ਹੈ ਖਾਰਾ ਲੇ ਕੋ ਬਸੀਦ ਦੇ ਵਿੱਚ ਘਾ ਲਓ ਉੱਥੇ ਗੋਲ ਦੇਣ ਰੱਖੀ ਹੋਈ ਜਿਹੜੇ ਧਰਮ ਵਿੱਚ ਗੋਲ ਕਰੀ ਉੱਥੇ ਕੰਮ ਚੱਲਦੇ ਹੋਰ ਕੋਈ ਸਿਸਟਮ ਹੋ ਸਕਦਾ ਹੈ ਤਨਵਰ ਆਰ ਕਿਸੇ ਨੇ ਹੁਣੀ ਰਪਿਆ ਤਨਵਰ ਗੁਰਪ੍ਰਸਾਦ ਨਰਨਜਣ ਪਾਉ ਕਿਉਂਕਿ ਨਰਨਜਣ ਦੀ ਲੋੜ ਨਹੀਂ ਰਹਿਦਾ ਉਦੋਂ ਜਿਹਦੇ ਤਨਮਨ ਨਾਲ ਪਿਆਰ ਨੂੰ ਰੱਜਣ ਮਿਲ ਗਿਆ ਗੁਰਪ੍ਰਸਾਦ ਲੋਜੋ ਤਾਂ ਹੀ ਪਾਉਗੇ ਤਨਮਨ ਨਾਲ ਪੁੱਛਦਾ ਹੂੰ ਇਹਨਾਂ ਨੂੰ ਰੱਜਣ ਦੀ ਲੋੜ ਨਹੀਂ ਹੈ ਜਿਹੜੇ ਗੁਰਦਾਰ ਜਾਂਦੇ ਨੇ ਕਿਸੇ ਨੂੰ ਰੱਜਣ ਦੀ ਲੋੜ ਨਹੀਂ ਹੈ ਜਿਹੜੇ ਗੁਰਦਾਰ ਜਿ ਰਹਿੰਦੇ ਨੇ ਪੂਜਾ ਚੜਾਉਂਦੇ ਨੇ ਕਰਦੇ ਨੇ ਸਭ कि ਜੇ ਜਕਰੂ ਨਾ ਜਿੰਦੀ ਬੱਲੇ ਨੂੰ ਲੋੜ ਹੋ ਉਹ ਚੁੱਪ ਐ ਬਣ ਉਹ ਆਪਣਾ ਉਹਨੇ ਗੁਰਦਾਰੇ ਲੈਣਾ ਵੀ ਕੀ ਹੈ ਉੱਥੇ ਤਾਂ ਲੜਨ हो ਗੱਲ ਹੀ ਵੱਧ ਹੋ ਜਾਈ ਉਹ ਕਹਿੰਦਾ ਗੁਰਦਾਰੇ ਜਿਹਦੇ ਜਾਵੇ ਕਾਸ ਨੂੰ ਗੁਰਦਾਰੇ ਕੀ ਕਰ ਜਾਵੇ ਪੁੱਠੀ ਬਤ ਲੈਣ ਜਾਵੇ ਥੋਟੂ ਕੀ ਕਰ ਜਾਵੇ ਦੱਸੋ ਪੁੱਠੀ ਬਤ ਲੈਣ ਜਾਊ ਉੱਥੇ ਸਿੱਧੀ ਬਾਤ ਆ ਤੁਹਾਡੇ ਕੋਲ ਹਾਇਓਰੀ ਤੋਂ ਇਹ ਲੇ ਗਿਆ ਹੋਇਆ ਕੀ ਹੈ ਗੁਰਬਾਨੀ ਕੀ ਗੱਜੇ ਤੁਸੀਂ ਕੀ ਕਰਦੇ ਹੋ ਦਰਜਨ ਦੀ ਪ੍ਰਾਪਤੀ ਗੁਰਬਾਨੀ ਦਾ ਟਾਰਗੇਟ है ਸਿੱਖ ਦਾ ਟਾਰਗੇਟ ਹੈ ਉਹ ਛੱਡਿਆ ਹੋਇਆ ਤੁਸੀਂ ਤੁਹਾਡਾ ਕੀ ਹੈ ਟਾਰਗੇਟ ਰਾਜ ਕਰੇਗਾ ਖਾਲਸਾ ਚੱਲ ਜਿਹਦੀ ਗੱਲ ਹੈ ਜਿਹੜੇ ਰਾਜ ਤੋਂ ਨਰਕ ਮਿਲਦਾ ਉਹ ਕਰੇਗਾ ਖਾਲਸਾ ਜਿਹੜੇ ਰਾਜ ਤੋਂ ਨਰਖ ਮਿਲਦਾ ਉਹ ਕਰੇਗਾ ਨਰ ਲੜਦਾ ਹੈ ਇਹ ਲੋਕ ਕਹਿੰਦਾ ਵੀ ਸਿੱਖ ਵੀ ਕਹਿਵੇ ਨਰਕ ਚ ਜਾਣਾ ਉਹ ਸਿੱਖਾ ਤਾਕਤਾਂ ਤੂੰ ਬਿਨਾਂ ਗੁਰੂ ਤੇ ਜਾਇਆ ਜਾਏਗਾ ਨਰਕ ਜਾਣ ਵਾਸਤੇ ਕਿਸੇ ਗੁਰੂ ਦੀ ਲੋੜ ਨਹੀਂ ਰਾਜ ਬਾਤ ਕਿਸੇ ਗੁਰੂ ਦੀ ਲੋੜ ਨਹੀਂ ਤੁਹਾਨੂੰ ਮਿਲ ਗਿਆ ਰਾਜ ਰਾਜ ਬਿਲ ਗਿਆ ਰਾਜ ਬਾਸ ਤੇ ਕਿਸੇ ਗੁਰੂ ਦੀ ਲੋੜ ਨਹੀਂ ਢਾਡ ਕਰਦੀ ਕਿਹੜਾ ਗੁਰੂ ਨਹੀਂ ਢਾਡ ਕੀਤਾ ਰਾਜਾ ਜੀ ਨੂੰ ਪਰਮੇਸ਼ਰ ਦਾ ਦੇਣਾ ਹੁੰਦਾ ਫਿਰ ਬਾਵਾ ਨੇ ਕਿਹਨੂੰ ਗੁਰੂ ਢਾਡ ਕੀਤਾ ਰਾਜ ਬਾਸ ਤੇ ਕਿਹਨੂੰ ਕੀਤਾ ਉਹ ਤਾਂ ਬਾਹੂ ਬਾਲ ਦੀ ਗੱਲ ਹੈ ਉਹ ਹੋਰ ਗੱਲ ਹੈ ਉਹ ਰਸਤਾ ਹੀ ਹੋ ਰ ਨਰਕ ਦਾ ਰਾਹ ਹੋ ਉਹਦਾ ਗੁਰੂਤਾ ਸੁਰਗ ਬਾਸ ਤੇ ਤਾਂ ਨਰਕ ਬਾਸ ਤੇ ਹੀ ਕਰੀਦਾ ਪਾਣੀ ਜੇ ਚੱਕਰ ਜਾਣਾ ਹੋਵੇ ਨਾ ਉੱਪਰ ਰੁਕ ਫਿਰ ਉਹਨੂੰ ਤਾਂ ਹੋਰ ਚਾਹੀਦੀ ਹੈ ਪਾਣੀ ਉੱਪਰੋਂ ਆਪੇ ਨਹੀਂ ਝੜਦਾ ਹੁੰਦਾ ਚੜਾਇਆ ਝੜਦਾ ਥੱਲੇ ਨੂੰ ਆਪੇ ਆ ਜਾਂਦਾ ਪਾਣੀ ਪਾੜ ਤੋਂ ਪਾਣੀ ਝੋਲੋਂ ਥੱਲੇ ਨੂੰ ਆਪੇ ਆ ਜਾਂਦਾ ਦਰਗਨੂ ਦਾ ਆਪੇ ਝੜਿਆ ਜਾਂਦਾ ਆਪਣੀ ਤਾਕਤ ਨਾਲ ਦਰਹੁਣੂ ਦਾ ਜੀਵ ਆਪੇ ਚਲੇ ਜਾਂਦਾ ਇਹ ਪਾਣੀ ਥੱਲੇ ਨੂੰ ਆਪੇ ਚਲੇ ਜਾਂਦਾ ਉੱਚਾ ਢਾੜੋਖ ਹੈ ਰੂ ਉੱਚਾ ਢਾੜੂ ਆ ਤੇ ਗੁਰੂ ਦੀ ਲੋੜ ਜੈਉਂਦੀ ਲੋੜ ਉੱਚਾ ਜਤੂ ਬਾਸਤੇ ਸਤਿਗੁਰੂ ਪੂਜਾ ਅਰਚਾ ਆਹੇ ਨਾ ਤੋਰੀ ਕਹਿਣ ਦਾ ਜਿਹੜੀ ਪੂਜਾ ਅਰਚਨਾ ਕਰਦੇ ਗੁਰਦੁਆਰੇ ਵਿੱਚ ਤੇਰੀ ਪੂਜਾ ਅਰਚਾ ਨਹੀਂ ਹੈ ਪੂਜਾ ਅਰਚਾ ਆਹੇ ਨਾ ਤੋਰੀ ਆ ਜਿਹੜੀ ਪੂਜਾ ਅਰਚਾ ਕਰ ਰਹੇ ਇਹ ਤੇਰੀ ਪੂਜਾ ਅਰਚਾ ਨਹੀਂ ਹੈ ਅਪੋਲਚਾ ਲੌਂਡੇ ਜਿਹੜਾ ਹੈ ਲੋ ਪਹਿਲਾਂ ਦੱਸਿਆ ਅਰਚਾ ਪੂਜਾ ਇਹਦਾ ਲੋਕਾਚਾਰ ਹੈ ਸਭ ਲੋਕ ਸਾਰੇ ਕਰਦੇ ਨੇ ਭੂਤਿਆਂ ਦੇ ਵੀ ਇਹੀ ਹੁੰਦਾ ਤੇਰੀ ਪੂਜਾ ਅਰਚਾ ਇਹਦਾ ਹਰ ਵਦਾਸ ਕਹੋਣਗਾ ਤਮੋਰੀ ਤੇ ਫਿਰ ਮੇਰੀ ਗਤੀ ਤੇ ਮੇਰੀ ਬੁੱਧੀ ਅਕੇ ਚੱਲੇ ਕਿੱਥੇ ਅੱਗੇ ਕਹਾਂ ਯਾਰ ਉਹਨੂੰ ਕਿੱਥੋਂ ਆਵੇ ਜਿਹੜਾ ਆ ਪੂਜਾਰ ਚ ਲੱਗਿਆ ਹੋਇਆ है ਜਿਹੜੀ ਸਾਰੀ ਪੂਜਾਰ ਚ ਹੈ ਉਹਦੀ ਬੁੱਧੀ ਸਟਿਲ ਲੈ ਉੱਥੇ ਘੜਾ ਕੋਈ ਤੇ ਬਦਲ ਨਹੀਂ ਸਕਦੀ ਹੈ ਉਹ ਤੇ ਕਦੇ ਬਦਲੂ ਜਾਂ ਤੋੜ ਨਹੀਂ ਉੱਥੇ ਬਦਲੂ ਤਾਂ ਜੋ ਤਗ ਬੁੱਧ ਗਾ ਤੁਰੂ ਆਇਆ ਤੋਰੀ ਕਹ ਰਵਦਾਸ ਕਬੜ ਕਤੋਰੀ ਰਵਦਾਸ ਕਹੇ ਫਿਰ ਇਦੋਂ ਮੈਂ ਗਾਹਾਂ ਕਿਵੇਂ ਤੁਰਾਂ ਗਾਹਾਂ ਦਾ ਗਿਆਨ ਮੇਰੇ ਕੋਲ ਮਿਭੜੇ